ਤੇ ਤੇ ਉਹ ਰਜੀਵ ਗਾਂਧੀ ਨੇ ਪ੍ਰਾਈਮ ਮਿੰਿਸਟਰ ਕਿਤਾਬ ਰੀਲਿਸ ਕੀਤੀ ਹਸਪਾਲ ਜੀ ਮੈਨੂੰ ਲੈ ਕੇ ਗਿਆ ਸਚੇ ਪਾਸ਼ਾ ਜੀ ਕੋਲ ਕਹਿ ਲਗੇ ਸੇ ਪਾਸ਼ੇ ਨੂੰ ਕਹਾ ਪੁਸਤਕ ਪੇਂਡ ਕਰੋ ਮੈਂ ਪਹਿਲੀ ਵਾਰ ਦਰਸ਼ਨ ਕੀਤੇ ਉਹਨਾਂ ਸੇਰਤ ਲੋਕ ਸਿੰਘ ਚਾਵਲਾ ਜੀ ਕੋਠੀ ਤੇ ਸਚੇ ਭਾਈ ਨੂੰ ਤਿੰਨ ਚਾਰ ਪੇਜ ਪੜ੍ਹੇ ਬੜੇ ਖੁਸ਼ ਹੋਏ ਕਹਿ ਲਗਾ ਤੁਸੀਂ ਸਾਰਾ ਕੁਕਾ ਇਤਿਹਾਸ ਹੀ ਲਿਖਿਆ ਬੜਾ ਅੱਛਾ ਲਿਖਿਆ ਹਿੰਦੀ ਬੜੀ ਸਰਬਾਚਾ ਲਿਖੀ ਹੈ ਤੁਸੀਂ ਸਤਗੁਰੂ ਪ੍ਰਤਾਪ ਸਿੰਘ ਦੇ ਉਤੇ ਇੱਕ ਕਿਤਾਬ ਲਿਖੋ ਮੈਂ ਸੱਚਾ ਬਹਾ ਜੀ ਮੈਂ ਵਸੇ ਕੋ ਲਿਖਾਰੀ ਤਾਂ ਹੈ ਨਹੀਂ ਪਰ ਆਪ ਜੀ ਹੁਕਮ ਕਰੋਗੇ ਮੈਂ ਲਿਖ ਦਿਆਂਗਾ ਪਰ ਮੇਰੇ ਦੋ ਮੇਰੀਆਂ ਸ਼ਰਤਾਂ ਨੇ ਇੱਕ ਮੈਂ ਝੂਠ ਨਹੀਂ ਲਿਖਦਾ ਤੇ ਇੱਕ ਮੈਂ ਪੈਸਾ ਨਹੀਂ ਲੈਂਦਾ ਕਿੰਨਾ ਲਗਾ ਸੀ ਝੂਠ ਲਿਖਾਣਾ ਨਹੀਂ ਤੇ ਪੈਸਾ ਦਾ ਹੈ ਕਿ ਅਸੀਂ ਕੋਈ ਪੈਸਾ ਤੁਹਾਨੂੰ ਨਹੀਂ ਦਿੰਦੇ ਪਰ ਤੁਹਾਨੂੰ ਕਿਤੇ ਬਾਹਰ ਭੇਜਣਾ ਪੈਗਾ ਵਿਦੇਸ਼ਾਂ ਤੇ ਖਰਚਾ ਅਸੀਂ ਕਰ ਦਿਆਂਗੇ ਮੈਂ ਕਿਹਾ ਠੀਕ ਹੈ ਜੀ ਕੰਮ ਚાલુ ਹੋ ਗਿਆ ਤੇ ਫਿਰ ਹੁਕਮ ਹੋਇਆ ਦਿਨ ਹੋਇਆ ਕਿ ਅਸੀਂ ਪਰਸੋਂ ਚੱਲੇ ਆ ਬੈਂਕ ਕੋਲ ਤੁਸੀਂ ਸਾਡੇ ਨਾਲ ਚਲੋ ਮੈਂ ਕਿਹਾ ਸਿਚਵਾ ਜੀ ਮੇਰੇ ਦਾ ਪਾਸਪੋਰਟ ਇਸ ਕੁਛ ਹਾਲੇ ਕੋਈ ਕਭੀ ਹੈ ਦੋ ਤਿੰਨ ਦਿਨ ਲੱਗਣਗੇ ਉਹਨਾਂ ਨੇ ਕਿਹਾ ਅੱਛਾ ਮੈਨਸਪਾਲ ਦੀ ਤੁਹਾਨੂੰ ਟਿਕਟ ਲੈ ਕੇ ਦੇ ਦੇਣਗੇ ਤੇ ਤੁਸੀਂ ਆਪਣਾ ਚਲੇ ਜਾਣਾ ਦੋ ਤਿੰਨ ਦਿਨ ਬਾਅਦ ਮੈਂ ਮੈਨਸਪਾਲ ਜੀ ਕੋਲ ਗਿਆ ਮੈਂ ਕਿਹਾ ਮੈਨਸਪਾਲ ਜੀ ਅਸਰਾ ਮੇਰਾ ਪਾਸਪੋਰਟ ਠੀਕ ਹੋ ਗਿਆ ਤੇ ਬੈਂਕ ਕੋਲ ਸਿਚਵਾ ਚਲੇ ਗਿਆ ਤੇ ਮੈਂ ਵੀ ਜਾਣਾ ਤੇ ਕੋਈ ਟਿਕਟ ਦਾ ਬੰਦੋਸ ਕਰ ਦਿਓ ਉਸ ਲੋਕਾਂ ਨੂੰ ਕੋਈ ਪ੍ਰੋਬਲਮ ਹੋਣੀ ਹੋਣਾ ਕਿ ਆ ਵੀ ਅਸਰਾ ਦਾ ਕੋਈ ਬਹਿਰ ਦਾ ਬੰਦੋਸ ਨਹੀਂ ਹੈਗਾ ਟਿਕਟ ਕਿਸਾ ਕਰੀਏ ਮੈਂ ਕਿਹਾ ਕੋਈ ਨਹੀਂ ਮੈਂ ਟਿਕਟ ਆਪ ਖਰਚ ਲਾਂਗਾ ਤੇ ਅਖਰ ਸੀ ਚਲੇ ਗਿਆ ਉੱਥੇ ਮੈਂ ਆਪਣੇ ਘਰਵਾਲੇ ਨਾਲ ਲੈ ਕੇ ਗਿਆ ਉੱਥੇ 7 ਦਿਨ ਜੋ ਅਸੀਂ ਕੌਤਕ ਦੇਖੇ ਸੁਣੇ ਸਾਨੂੰ ਇਸ ਲਾਗੇ ਭਗਵਾਨ ਕ੍ਰਿਸ਼ਨ ਭਗਵਾਨ ਰਾਮ ਦਾ ਕੋ ਦੁਆਪਰ ਤੇ ਤ੍ਰੇਤਾ ਦਾ ਵਜ ਇਹ ਸਤਗੁਰ ਗੁਰਨਾਗ ਦੇਵ ਜੀ ਦਾ ਅਸੀਂ ਸਮੇਂ ਦੇਖ ਰਹੇ ਹਾਂ ਪੰਜਾ ਲਗਾਇਆ ਪਾਣੀ ਨਿਕਲ ਆਇਆ ਉਸੇ ਸ਼ਮਸ਼ੇਰ ਸਿੰਘ ਚਾਵਲ ਨਰੂਲਾ ਕੰਦਰ ਕਿ ਮੇਰੇ ਸਾਰੇ ਜਿਸਮ ਤੇ ਸਫੇਦ ਦਾਗ ਹੋ ਗਿਆ ਪੁਲਬੈਰੀ ਹੋ ਗਈ ਮੈਂ ਸਤਿ ਕੋ ਪ੍ਰਤਾਪ ਸਨ ਨੂੰ ਕਿਹਾ ਮੈਂ ਸੱਚੇ ਬਾਦਸ਼ਾਹ ਜੀ ਬੜਾ ਖਰਚ ਕੀਤਾ ਕੁਝ ਠੀਕ ਨਹੀਂ ਹੋ ਰਿਆ ਉਹ ਕਾਰ ਚਲਾ ਰਹੇ ਸਨ ਤੇ ਮੇਰੇ ਉਹਨਾਂ ਨੇ ਕਬੀਚ ਉੱਪਰ ਚੱਕ ਕੇ ਹੱਥ ਫੇਰਿਆ ਪਿੱਠ ਤੇ ਕਹਿੰਦੇ ਕਿ ਮੈਨੂੰ ਤਾਂ ਕੋਈ ਸਫੇਦ ਦਾਗ ਨਹੀਂ ਜਾਬਦੇ ਕਹਿੰਦਾ ਮੈਂ ਘਰ ਗਿਆ ਤੇ ਸ਼ੀਸ਼ੇਦਲੇ ਦੇਖਿਆ ਤਾਂ ਕੋਈ ਸਫੇਦ ਦਾਗ ਨਹੀਂ ਸੀ ਉਹ ਜੋ ਕੌਤਕ ਉਹਦੇ ਵੱਡੇ ਭਾਈ ਸੇਰ ਜੀ ਨੁਰਾ ਸਾਹਿਬ ਉਹ ਕਹਿਣ ਲੱਗੇ ਮੇਰੀ ਵਾਈਫ ਨੂੰ ਬੜੀ ਛਪਾਕੀ ਹੋਏ ਮੈਂ ਸੱਚੇ ਬਾਦਸ਼ਾਹ ਜੀ ਜੇਪਾ ਕਿਰਪਾ ਕਰੋ ਕਹਿੰਨੇ ਕਿ ਤੂੰ ਗੱਦਾੜੀ ਰੰਗਣੀ ਬੰਨ੍ਹ ਕਰਦੇ ਸੇਪਾ ਕਿ ਠੀਕ ਹੋ ਜਾਏਗੀ ਤੇ ਸਾਰੇ ਕੌਤਕ ਸਾਡੇ ਵਾਸਤੇ ਤੇ ਬੜੀ ਨਵੀਂ ਗੱਲ ਸੀ ਸਾਨੂੰ ਤਾਂ ਕੋਈ ਪਤਾ ਵੀ ਨਹੀਂ ਸੀਗਾ ਅਸੀਂ ਬੜੇ ਰਿਕਾਰਡ ਕੀਤੇ ਸਭ ਕੋਈ ਕੀਤੇ ਇੱਕ ਦਿਲ ਕਹੇ ਕਿ ਬਿਲਕੁਲ ਸੱਚੇ ਨੇ ਤੇ ਇੱਕ ਗੱਲ ਕਹੇ ਵੀ ਇਹ ਗੱਲਾਂ ਅੱਜ ਦੇ ਜ਼ਮਾਨੇ ਕਿਦਾਂ ਹੋ ਸਕਦੀਆਂ ਹੁਣ ਸਮਝ ਆਈ ਕਿ ਜਿਦਾਂ ਕਿਤਾਬ ਛਾਪੀਏ ਕੀ ਕਰੀਏ ਮਨ ਕਹਦਾ ਜੀ ਕਿ ਸਭ ਸਭ ਕੁਝ ਸੱਚ ਬੋਲਣੇ ਐ ਜੇ 70 80 ਸਾਲ ਦੇ ਲੋਕ ਨੇ ਅਸੀਂ ਕਿਹਾ ਵੀ ਇੱਕ ਗੱਲ ਹੈ ਕਿ ਗੁਰੂ ਤੁਸੀਂ ਅਗਰ ਧਾਰਨ ਕਰਨਾ ਹੈ ਆਦਮੀ ਘੜਾ ਵੀ ਠੋਕ ਵਜਾ ਕੇ ਰਹਿੰਦਾ ਤੇ ਗੁਰੂ ਧਾਰਨ ਕਰਨਾ ਕੁਝ ਤਾਂ ਪਤਾ ਲੱਗਣਾ ਚਾਹੀਦਾ ਅਸੀਂ ਮੰਨ ਚਾਹਿਆ ਪਰ ਜੇ ਆਪਣੀ ਘਰਵਾਲੇ ਨਾਲ ਪ੍ਰੋਗਰਾਮ ਬਣਾਇਆ ਕਿ ਜਿੰਨਾ ਸਾਡਾ ਖਰਚਾ ਹੋਇਆ ਹਿਸਾਬ-ਕਿਤਾਬ ਲਗਾ ਲਿਆ ਅਸੀਂ ਸਤਿਗੁਰਾਂ ਕੋਲ ਇੱਕ ਪੈਸਾ ਨਹੀਂ ਲੈਣਾ ਅਗਰ ਗੁਰੂ ਸੱਚਾ ਸਾਡਾ ਪੈਸਾ ਕਿਧਰੋਂ ਬਾਹਰੋਂ ਆ ਦੇਗਾ ਅਸੀਂ ਉਥੋਂ ਵਾਪਸ ਆ ਗਏ ਹਿਸਾਬ-ਕਿਤਾਬ ਲਗਾਇਆ ਕਰਨ ਜੀ ਐਨੇ ਹਜ਼ਾਰ ਰੁਪਏ ਖਰਚ ਹੋ ਗਿਆ ਫੋਰਨ ਐਕਸਚੇਂਜ ਵੀ ਹੈ ਇਹ ਵੀ ਹੈ ਸਤਸੰਗਤ ਜੀ ਮਹੀਨੇ ਜੰਦਰ-ੰਦਰ ਵਾਪਸ ਆਂਦੇ ਬਾਅਦ ਉਹਨਾਂ ਪਿਆ ਸਾਡਾ ਕਿਸੇ ਅਨਐਕਸਪੈਕਟ ਸੋਰਸੋਂ ਆਇਆ ਸਾਨੂੰ ਪਤਾ ਨਹੀਂ ਸਾਡਾ ਪੈਸਾ ਤੇ ਫਸਿਆ ਪਿਆ ਮੇਰੀ ਤਾਂ ਤਸੱਲੀ ਹੋ ਗਈ ਮੈਂ ਸੱਚੇ ਪਾਤਸ਼ਾਹ ਦੇਖੋ ਕਿਰਪਾ ਕਰਤੀ ਤੇ ਮੇਰੀ ਘਰਵਾਲੀ ਫੇਰੇ ਕਹੇ ਵੀ ਇਹ ਵਹਦ ਆਪਣਾ ਸੀ ਮੈਂ ਕਿ ਸਾਨੂੰ ਪਤਾ ਨਹੀਂ ਸੀ ਖੈਰ ਸੱਚੇ ਵਾਹ ਜ ਨੇ ਕੋਟਕ ਦਿਖਾਣਾ ਸੀ ਕੰਮ ਚੱਲ ਰਿਆ ਸੀ ਉਹਨਾਂ ਦੇ ਪੰਜਾਬੀ ਦੇ ਰਿਕਾਰਡਿੰਗ ਕੀਤੀ ਸੀ ਉਹਨੂੰ ਲਿਖ ਕੇ ਹਿੰਦੀ ਲਿਖ ਰਿਆ ਸਾਂ ਤੇ ਮੇਰਾ ਐਕਸੀਡੈਂਟ ਹੋ ਗਿਆ ਤੇ ਮੇਰੀ ਐਕਸੀਡੈਂਸ ਹੋਇਆ ਮੈਂ 3 ਵਾ ਸਕੂਟਰ ਜਾ ਰਿਹਾ ਸਾਂ ਤੇ ਪਿੱਛੋਂ ਇੱਕ ਬੱਚੇ ਦੋ ਗਿਆ ਆ ਗਿਆ ਤੇ ਉਹਨੇ ਸਕੂਟਰ ਵਾਲੇ ਬ੍ਰੇਕ ਲਗਾਈ ਪਿੱਛੇ ਇੱਕ ਟੈਕਸੀ ਫੜ ਚੜ੍ਹ ਚਲੀ ਮੈਨੂੰ ਸਭ ਸੇਠ ਦਾ ਸਿੰਘ ਚਾਲਵਾ ਨੇ ਕਿਹਾ ਸੀ ਇੱਕ ਵਾਰੀ ਮੇਰੀ ਗੱਡੀ ਦਾ ਬੁਰਾ ਹਾਲ ਸੀ ਮੈਂ ਕਿਹਾ ਦਨਸਤ ਕੋ ਪ੍ਰਤਾਪ ਸਿੰਘ ਦਨਸਤ ਕੋ ਪ੍ਰਤਾਪ ਸਿੰਘ ਤੇ ਮੇਰਾ ਐਕਸੀਡੈਂਟ ਬਚ ਗਿਆ ਤੇ ਮੇਰੇ ਮੂੰਹ ਜੀ ਨਿਕਲਿਆ ਦਨਸਤ ਕੋ ਪ੍ਰਤਾਪ ਸਿੰਘ ਦਨਸਤ ਕੋ ਪ੍ਰਤਾਪ ਸਿੰਘ ਮੈਂ ਸਾਥ ਸੰਗਤ ਜੀ ਆਪਣੀ ਅੱਖਾਂ ਨਾਲ ਵੇਖਿਆ ਕਿਸੇ ਨੇ ਉਹ ਟੈਕਸੀ ਫੜ ਕੇ ਪਿੱਛੇ ਘਜ ਉਹ ਟੈਕਸੀ ਡਰਾਈਵਰ ਕਹਿੰਦਾ ਬੌਜੀ ਗੱਡੀ ਮੇਰੀ ਕਿਨੇ ਖਿੱਚੀ ਫਿਰ ਵੀ ਥੋੜੀ ਜਿਹੀ ਚੜ ਗਈ ਟੱਕਰ ਵੱਜ ਗਈ ਪਰ ਮੇਰਾ ਤਿੰਨ ਜਗ੍ਹਾ ਤੋਂ ਹੈ ਟੁੱਟ ਗਈ ਇੱਕ ਲਾਈ ਟੁੱਟ ਗਈ ਮੈਂ ਗਿਆ ਅਕਸੇ ਕਰਾਇਆ ਕਹਿੰਨਗੇ ਤਿੰਨ ਜਗ੍ਹਾ ਟੁੱਟ ਗਈ ਹੈ ਅਗਲੇ ਦਿਨ ਜਾ ਕੇ ਮੈਂ ਪਲਾਸਟਰ ਲਗਵਾਇਆ ਉਹਨਾਂ ਨੇ ਕਿਹਾ ਵੀ ਇਹ 12 ਹਫ਼ਤੇ ਪਲਾਸਟਰ ਹੈ ਜ਼ਰ ਸਮਾਲ ਕੇ ਚੱਲੇ ਜਾ ਮੈਂ ਨਹੀਂ ਉਂਗਲੀਆਂ ਨੰਗੀਆਂ ਰੱਖ ਲਈਆਂ ਕੋ ਕੰਮ ਚੱਲ ਰਹੀ ਸੀ ਤੇ ਛੇ ਹਫਤੇ ਹੋ ਗਏ ਤੇ ਪਸੀ ਗਰੀ ਬੜੀ ਗਰਮੀ ਦਿੱਲੀ ਤੁਹਾਨੂੰ ਪਤਾ ਹੀ ਹੈ ਪਸੀਨਾ ਬੜਾ ਖੁਰਕ ਹੋਏ ਤੇ ਮੇਰੇ ਦਰਲੇ ਚ ਆਇਆ ਮੈਂ ਕਿਹਾ ਤੂੰ ਕਾਹਦਾ ਸਤਗੁਰੂ ਹੈ ਇੱਕ ਤੂੰ ਕਥਾ ਲਿਖਵਾ ਰਿਹਾ ਇੱਕ ਮੇਰੀ ਬਾਹ ਤੋ ਛੱਡੀ ਇਹ ਦੋ ਗੱਲਾਂ ਕਿਦਾਂ ਚੱਲਣੀਆਂ ਮੈਂ ਰੋਇਆ ਵੀ ਸਹੀ ਫਿਰ ਮੈਂ ਚੰਗ ਕੰਮ ਚਾਲੂ ਕਰਤਾ ਤੇ ਥੋੜੀ ਦਿਨ ਬਾਅਦ ਹੀ ਉਹਨਾਂ ਦੇ ਸਖਤਰ ਸੀਗੇ ਕੋਈ ترسیਮ ਤੇ ਉਹਨਾਂ ਦਾ ਫੋਨ ਆਇਆ ਕਹਿੰਦੇ ਸੱਚੇ ਵਾਹ ਤੁਹਾਨੂੰ ਯਾਦ ਕੀਤਾ ਮੈਂ ਕਿਹਾ ਜੀ ਮੇਰੇ ਐਕਸੀਡੈਂਟ ਹੋ ਗਿਆ ਸਜੀ ਬਾਹ ਟੁੱਟ ਗਈ ਹੈ ਤੇ ਮੈਂ ਤਾਂ ਆ ਨਹੀਂ ਸਕਦਾ ਅਗਲੇ ਦਿਨ ਸਤਗੁਰੂ ਦਾ ਫੋਨ ਆ ਗਿਆ ਕਾ ਨਗਾ ਰੀਜੀ ਥੋੜੀ ਸਜੀ ਬਾ ਕਿਦਾਂ ਟੁੱਟ ਸਕਦੀ ਹੈ ਤੂੰ ਸਤਿਗੁਰੂ ਪ੍ਰਤਾਪ ਸਿੰਘ ਦੀ ਕਥਾ ਲਿਖ ਰਿਓ ਨਾ ਤੌਰੀ ਬਾ ਸਜੀ ਟੁੱਟੀ ਹੈ ਨਾ ਕੋਈ ਕਹੀ ਟੁੱਟਨੀ ਹੈ ਤੇ ਤੁਸੀਂ ਇਹ ਚੱਕਰਾ ਨਾ ਪਾਓ ਮੈਂ ਸਤਿਗੁਰੂ ਸੱਚੇ ਬਾਸ਼ਾ ਤੁਸੀਂ ਮਜ਼ਾਕ ਕਿਤੇ ਆ ਰਹੇ ਹੋ ਵੱਡੇ ਵੱਡੇ ਸਿਆਣੇ ਡਾਕਟਰਾਂ ਨੇ ਵੇਖਿਆ ਐਕਸਰੇ ਵੇਖੇ ਨਾ ਬਰਸਟ ਜਿਹੜਾ ਚਾਰ ਪੰਜ ਮਿੰਟ ਸਾਡੀ ਬਹਿਸ ਚੱਲਦੀ ਰਹੀ ਉਹ ਕਹਿੰਦੇ ਮੇਰੇ ਬਚਨ ਮੰਨੋ ਸਾਨੂੰ ਕੀ ਪਤਾ ਮੈਂ ਅਕਾਲਪੁਰ ਹਣਾ ਗੱਲ ਕਰ ਰਹੇ ਸਾਨੂੰ ਕੋਈ ਸਮਝ ਨਹੀਂ ਸੀਗੀ ਨਾ ਭਜਨ ਲਿਆ ਸੀ ਨਾ ਕੋਈ ਅਕਲ ਸੀਗੀ ਖੈਰ ਫਿਰ ਕਹਿਣ ਲੱਗੇ ਮੈਂ ਤੁਸੀਂ ਸਾਡੇ ਕੋਲ ਭਜਨ ਲਿਆ ਮੈਂ ਕਿ ਸੱਚੇ ਬਾਝ ਮੈਂ ਤਾਂ ਭਜਨ ਨਹੀਂ ਰਿਹਾ ਕਹਿੰਦੇ ਕਿਹੜਾ ਪਾਠ ਕਰਦੇ ਹੋ ਮੈਂ ਕਹਿੰਦੇ ਮੈਂ ਤਾਂ ਗਾਇਤਰੀ ਮਦਰ ਪਾਠ ਕਰਨਾ ਕਹਿੰਦੇ ਕਿ ਇਸ ਰੰਗ ਮੈਂ ਹਾਰਟ ਦਾ ਆਪਰੇਸ਼ਨ ਕਰਾਉਣਾ ਆਸਟ੍ਰੇਲੀਆ ਜਾ ਰਿਹਾ ਤੇ ਤੁਸੀਂ ਮੇਰੇ ਵਾਸਤੇ ਇਸ ਵਾਸਤੇ ਇੱਕ ਮਾਲਾ ਮੈਜੀ ਸੱਚੋਚ ਫਿਰ ਫੋਨ ਰੱਖਣ ਲੱਗੇ ਕਹਿੰਦੇ ਕਿ ਰੀਜੀ ਮੇਰਾ ਬਚਨ ਮੰਨੋ ਕਿਸੇ ਹੋਰ ਡਾਕਟਰ ਕੋ ਜਾਓ ਤੇ ਆਪਣਾ ਦੁਬਾਰਾ ਐਕਸਰੇ ਕਰਾਓ ਤੇ ਤੁਹਾਡੀ ਬਹਾਨੀ ਟੁੱਟ ਸਕਦੀ ਉਹ ਮੇਰੀ ਘਰ ਜਿਹੜੀ ਪਹਿਲੇ ਇਨਾ ਸੀ ਉਹ ਕਹਿੰਦੇ ਕਿ ਤੁਸੀਂ ਸੱਚੇ ਬਾਝ ਨਾ ਬਹਿਸ ਕਿਉਂ ਕਰ ਰਹੇ ਹੋ ਮੈਂ ਕਹਿੰਦਾ ਸੱਚੇ ਬਾਝ ਐਸਾ ਨਾ ਮਜ਼ਾਕ ਕਰ ਰਹੇ ਕਹ ਸੱਚੇ ਵਾ ਮਜ਼ਾਕ ਕਿਉਂ ਕਰਨਗੇ ਤੁਹਾਡਾ ਮੈਂ ਕਿਹਾ ਮੇਰੀ ਬਾਹ ਵੀ ਠੀਕ ਹੋ ਗਈ ਹੋਣੀ ਹੈ ਕਹ ਲਗਾ ਤੁਸੀਂ ਉੱਥੇ ਆਪਾਂ ਜਿਹੜਾ ਕੌਤਕ ਦੇਖ ਕੇ ਆਇਆ ਉੱਥੇ ਉਹ ਕੀ ਸੀਗਾ ਮੈਂ ਖੜ ਡਾਕਟਰ ਕੋਲ ਦੂਸਰੇ ਕੋਲ ਗਿਆ ਉਹਨਾਂ ਹਸਪਤਲ ਉਹਨੂੰ ਮੈਂ ਕਿਹਾ ਵੀ ਮਰਾ ਤੁਸੀਂ ਕਹ ਲਗਾ ਜੀ ਹਲੇ ਟਾਈਮ ਲੱਗੇਗਾ ਮੈਂ ਕਿਹਾ ਜੀ ਟਾਈਮ ਤਾਂ 6 ਹਫ਼ਤੇ ਹੋਇਆ ਨਾ ਮੈਨ ਪਤਾ ਪਰ ਤੁਸੀਂ ਮੇਰਾ ਐਕਸਰੇ ਕਰਾਓ ਉਹਨਾਂ ਨੇ ਕਿਹਾ ਅੱਛਾ ਪਲਾਸਟਰ ਕਟਵਾਓ ਤੇ ਮੈਂ 12 ਵਜੇ ਪੁਰਾਣਾ ਐਕਸਰੇ ਲੈ ਕੇ ਉਸੇ ਉਸੇ ਜਗ੍ਹਾ ਤੇ ਜਿੱਥੇ ਪਹਿਲੇ ਐਕਸਰੇ ਕਰਾਇਆ ਸੀ ਤੇ ਉਹਨੇ ਮੈਨੂੰ ਕਿਹਾ ਤੁਸੀਂ 12 ਵਜੇ ਗਏ ਹੋ ਸੰ ਤੁਸੀਂ ਸ਼ਾਮੀ 5 ਵਜੇ ਆਇਆ ਜੇ ਮੈਂ ਕਿਹਾ ਜੀ ਮੈਨੂੰ ਤਾਂ ਹੁਣੇ ਐਕਸਰੇ ਚਾਹੀਦਾ ਕਹਿੰਦਾ ਫਿਰ ਘੰਟਾ ਵੇਟ ਕਰੋ ਮੈਂ ਉੱਥੇ ਰੁਕ ਗਿਆ ਗਾਟੇ ਨੂੰ ਮੈਂ ਤਾਂ ਪਾੜ ਕਰਦਾ ਰਿਹਾ 50 ਮਿੰਟ ਬਾਅਦ ਅੰਦਰੋਂ ਡਾਕਟਰ ਆਇਆ ਕਹਿੰਦਾ ਜੀ ਪੁਰਾਣਾ ਐਕਸਰੇ ਦੇ ਦਿਓ ਮੈਂ ਉਹ ਦਿੱਤਾ ਫਿਰ 10 ਮਿੰਟ ਡਾਕਟਰ ਮੈਨੂੰ ਅੰਦਰ ਬੁਲਾਇਆ ਪੰਜ ਡਾਕਟਰ ਲੱਗੇ ਸਨ ਕਹਿੰਦਾ ਤੁਹਾਨੂੰ ਕਿਹਨੇ ਕਿਹਾ ਤੁਹਾਡੀ ਬਾਹਾਂ ਟੁੱਟੀ ਹੈ ਮੈਂ ਕਿਹਾ ਤੁਸੀਂ ਕਿਹਾ ਅੱਜ ਤਾਂ ਨਹੀਂ ਟੁੱਟੀ ਹੋਈ ਮੈਂ ਕਿਹਾ ਤੁਸੀਂ ਪਿਛਲੇ ਦਿਨ ਗਲਤੀ ਲੱਗੀ ਕਹਿੰਦਾ ਗਲਤੀ ਵੀ ਨਹੀਂ ਲੱਗੀ ਇਹ 6 ਹਫ਼ਤੇ ਜੁੜ ਕੌਤਕ ਦਿਖਾ ਕੇ ਤੇ ਕਿਰਪਾ ਕੀਤੀ ਕਰੋ ਕਿਤਾਬ ਛਪ ਗਈ ਸਭ ਕੁਝ ਠੀਕ ਹੋ ਗਿਆ ਨਾਮਦਾਰੀ ਆਪ ਛਾਪੀ ਤੇ ਮੈਨੂੰ ਸੇਵਾ ਦਾ ਮੌਕਾ ਮਿਲਿਆ ਉੱਥੇ ਸਤਗੁਰਾਂ ਨੇ ਨਾਮ ਉਹ ਗੁਰਦੁਆਰੇ ਚ ਬੈਂਕਾ ਕਿਹਾ ਹਿੰਦੁਸਤਾਨ ਤੋਂ ਬੜੇ ਵੱਡੇ ਲਿਖਾਰੀ ਆਏ ਨੇ ਮੈਂ ਸਿਹਤ ਤਰੋਕ ਸਿੰਘ ਚਾਹਵਲਾ ਜੀ ਨੂੰ ਕਿਹਾ ਮੈਂ ਕਿਹਾ ਸਤਗੁਰਾਂ ਨੂੰ ਗਲਤੀ ਲੱਗੀ ਹੈ ਮੈਂ ਤਾਂ ਬਿਜ਼ਨਸ ਕਰਨਾ ਮੇਰਾ ਤਾਂ ਕੋਈ ਲਿਖਾਰੀ ਹਾ ਨਹੀਂ ਇੱਕ ਕਿਤਾਬ ਲਿਖੀ ਹੈ ਨਹਿਰੂ ਦੀ ਇੱਕ ਦੋ ਹੋਰ ਲਿਖ ਚੜੀਆਂ ਸ਼ੌਕੀਆਂ ਉਹ ਕਹਿੰਨਗੇ ਸਤਗੁਰਾਂ ਨੇ ਬਚਨ ਕਰਤਾ ਉਹਨ ਤੁਸੀ ਦੇਖੋ ਕਿੰਨੀ ਕਿਤਾਬਾਂ ਲਿਖਦੇ ਹੋ ਤੇ ਇਹ 13ਵੀਂ ਕਿਤਾਬ ਲਿਖੀ ਗਈ ਜੇ ਮਤਲਬ ਇਹ ਸਤਗੁਰਾਂ ਦਾ ਹੀ ਚੱਲੇ ਕੌਤਕ ਮੈਨੂੰ ਤਾਂ ਆਪ ਸਮਝ ਨਹੀਂ ਆਈ ਤੇ ਇਹ ਸਤਗੁਰਾਂ ਦੀ ਕੌਤਕ ਕਿਤਾਬ ਲਿਖੀ ਮੈਂ ਪ੍ਰਧਾਨ ਮੰਤਰੀ ਬਾਜਪੀ ਨਾਲ ਨੂੰ ਬਹੁਤ ਵਕਫੀ ਸੀ ਮੈਂ ਉਹਨਾਂ ਨੂੰ ਜਾ ਕੇ ਪੁਸਤਕ ਵੇਚ ਦਿੱਤੀ ਉਹਨਾਂ ਨੇ ਇਹ ਕੌਤਕ ਪੜ੍ਹੇ ਕਿ ਕਿਸ ਨਾਂ ਬਾਟ ਪੁੱਟੀ ਠੀਕ ਹੋ ਗਈ ਕਿਸ ਤਰ੍ਹਾਂ ਹੋਏ ਕਹਿਣ ਲੱਗੇ ਤੁਸੀਂ ਸੱਚ ਲਿਖਿਆ ਮੈਂ ਕਿਹਾ ਜੀ ਮੈਂ ਝੂਠ ਕਿਉਂ ਲਿਖਾਂਗਾ ਕਹਿਣ ਲੱਗੇ ਮੈਂ ਬੜੀ ਮੁਸੀਬਤ ਵਿੱਚ ਜਾ ਰਹਾ ਹਾਂ ਦਰਸ਼ਨ ਕਰਾਓ मैग्जी आपको मुश्किल क्या है आप दर्शन जबर जी कर लो कह लगा मैं आम से बात करके आओ मैं फोन पे बात करनी है मेरा फोन ले लेंगे कह लगा मैंने आगे भी ट्राई किया है पर वो वो एक्चुअली कांग्रेस के है ना वो अस्पताल जी वो बात नहीं करने देते ये बीजेपी इधर चले जाएं मैग्जी वो सतगुरु है, है? कांग्रेस साहब को तल्लग रही है कर मैं पहले जुलाई नु सचेवाया को गया मैं सचेवाया प्रधानमंत्री थोड़ा गल करना चाहता है ते आप जी कृपा करो ਕੰਨ ਠੀਕ ਹੈ ਉਹਨਾਂ ਕੋਲ ਗੱਲ ਕਰ ਲੈ 10 ਤੱਕ ਉਹਨੂੰ ਫੋਨ ਕਰਦੇ ਰਹਿ ਸਤਿਗੁਰੂ ਕਿਦਰ ਸਨ ਉਹ ਕਹਿੰਦੇ ਬਿਰਾਜ ਗਿਆ ਨੇ ਅਸਰੇ ਕੀਰਤਨ ਤੇ ਨੇ ਅਸਰੇ ਨਿਤਨੇਮ ਤੇ ਨੇ ਸਾਰਾ ਦਿਨ ਉਹਨਾਂ ਸੈਕਟਰੀ ਦਾ ਫੋਨ ਆਇਆ ਕਹਿੰਦੇ ਸਾਡੀ ਨੌਕਰੀ ਚਲੀ ਜਾਏਗੀ ਉਹ ਪ੍ਰਧਾਨ ਮੰਤਰੀ ਤੇ ਫੋਨ ਨਹੀਂ ਚੁੱਕਦਾ ਉਹ ਲੈਂਦਾ ਮੈਂ ਕਿਹਾ ਸਤਿਗੁਰੂ ਨੇ ਤੇ 9 ਵਜੇ ਬਾਅਦ ਫੋਨ ਨਾ ਕਰਾਂ ਉਹ ਵਿਲਜ ਜਾਂਦੇ ਨੇ ਮੈਂ ਫਿਰ ਸਿਹਰੇ ਫੋਨ ਕੀਤਾ ਮੈਂ ਕਿਹਾ ਦਸ਼ਪਾਲ ਮੈਂ ਕਿਹਾ ਜੀ ਸੱਚੇ ਭਾਸ਼ਣ ਕੋ ਕਿਰਪਾ ਨਾਲ ਆਪ ਕਹਤੀ ਸੀ ਬਾਜਪਈ ਨੇ ਗਲਤ ਤਾਂ ਕਰ ਲਿਆ ਨਾ 7:30 ਵਜੇ ਬਾਜਪਈ ਦੀ ਫੋਨ ਤੇ ਗੱਲਬਾਤ ਹੋਈ ਉਹ ਕਹਿੰ ਲੱਗੇ ਜੀ ਮੈਂ ਪ੍ਰਣਾਮ ਕਰਤਾ ਹਾਂ ਵहां से ਪਾਕਿਸਤਾਨ ਦਾ ਪ੍ਰੈਜ਼ੀਡੈਂਟ ਆ ਰਹਾ ਹੈ ਬੁਸ਼ਰਫ ਤਾਂ ਮੈਨੂੰ ਬਹੁਤ ਡਰ ਲੱਗ ਰਹਾ ਕਿ ਮੇਰੇ ਸੇ ਕੋਈ ਗਲਤ ਐਗਰੀਮੈਂਟ ਸਾਈਨ ਹੋ ਜਾਏ ਕਹਿੰਦੇ ਕਿ ਸਤਿਗੁਰੂ ਆਪ ਕਿਰਪਾ ਕਰਨਗੇ ਆਪਕਾ ਕੋਈ ਐਗਰੀਮੈਂਟਸ ਆਪ ਕੁਛ ਸਾਈਨ ਵੀ ਨਹੀਂ ਕਰੋਗੇ ਫਿਕਰ ਨਾ ਕਰੋ ਉਹਦਾ ਬਚਾਓ ਹੋ ਗਿਆ ਜੀ ਉਹ ਫਿਰ ਮੈਨੂੰ ਰੋਜ਼ ਚੱਲਿਆ ਭੇਜੇ ਕਿ ਮੈਂ ਸਤਿਗੁਰੂ ਦਰਸ਼ਨ ਕਰਨ ਮੈਂ ਕਿ ਜੀ ਤੁਸੀਂ ਪ੍ਰਧਾਨ ਮੰਤਰੀ ਹੋ ਜਹਾਜ਼ ਲਾਓ ਤੇ ਟੁਰ ਜਾਓ ਉੱਥੇ ਹੈਲੀਕਾਪਟਰ ਤੇ ਉਹ ਜਾਣਾ ਪਾਇਆ 9 ਜਨਵਰੀ ਨੂੰ ਮੈਨੂੰ ਰਾਤੀ ਕੋਈ 10 ਵਜੇ ਪਤਾ ਲੱਗਿਆ ਕਿ ਸੱਚੇ ਬਾਸ਼ਾ ਜੀ ਦਿੱਲੀ ਮੈਂ ਬਾਜਪੀ ਦੇ ਘਰ ਫੋਨ ਕੱਟ ਰਿਹਾ ਸੁਣਿਆ ਦਿੱਤਾ ਸਵੇਰੇ ਸੱਚ ਬਜਾ ਰਮੇਸ਼ਨਾ ਗੁਰਦੁਆਰੇ ਤੋਂ ਕੋਈ 7:00 ਸਵੇਰੇ 7:00 ਵਜੇ ਆਪਣੇ ਡੇਰੇ ਵਿੱਚ ਚੜ੍ਹੇ ਤੇ ਪੁਲਿਸ ਨੇ ਉਹਨਾਂ ਦਾ ਡੇਰਾ ਕਿਰਿਆ ਸੀ ਕਰੇ ਰਿਸ਼ਵਾਰ ਸਾਡਾ ਡੇਰਾ ਪੁਲਿਸ ਨੇ ਕਿਉਂ ਕਿਰਿਆ ਤੋ ਇੱਕ ਪੁਲਿਸ ਅਫਸਰ ਵਾਲਾ ਪੁੱਛਿਆ ਕਹਿੰਦਾ ਕਿ ਪ੍ਰਧਾਨ ਮੰਤਰੀ ਆ ਰਹੇ ਉੱਥੇ ਉਹ ਤੇ ਲੇਟ ਕਰ ਦਿਆ ਮੈਂ ਤਾਂ ਅਪੋਲੋ ਹਸਪੀਟਲ ਚੈੱਕਅਪ ਕਰਾਣੇ ਜਾ ਰਹਾ ਪ੍ਰਧਾਨ ਮੰਤਰੀ ਨੂੰ ਉਠਾਤਾ ਕਹਿੰਦਾ ਮੈਨੂੰ ਫਿਰ ਫੋਨ ਕਰਦਾ ਰਿਹਾ ਪ੍ਰਧਾਨ ਮੰਤਰੀ ਕਹਿੰ ਲੱਗੇ ਸਤਗੁਰੂ ਬੋਲੋ ਕਿ ਮuje ਬੁਲਾਏ ਮੈਂ ਕਹ ਜੀ ਆਪਕੋ ਹਿੰਮਤ ਆਪਨੇ ਕਰਨੀ ਹੈ 19 ਮਈ ਨੂੰ ਸਤਿਗੁਰੂ ਸਚੇ ਪਾਤਸ਼ਾਹ ਜੀ ਦੀ ਕਿਰਪਾ ਬਖਸ਼ਿਸ਼ ਹੋਈ ਉਤੇ ਉਤੇ ਪੈਰਾ ਲੱਗ ਗਿਆ ਸਤਿਗੁਰਾਂ ਦਾ 19 ਮਈ ਨੂੰ ਉਹ ਚਲਾ ਗਿਆ ਬਾਜਪਾਈ ਜੀ ਚਲੇ ਗਏ ਜੰਮੂ ਉਹਦੋਂ ਇੱਕ ਕਾਂਗਰਸ ਕਸ਼ਮੀਰ ਦਾ ਲੀਡਰ ਸੀਗਾ ਹਰੀਦ ਦਾ ਉਹਦਾ ਕਤਲ ਹੋ ਗਿਆ 20 ਮਈ ਨੂੰ ਬਾਜਪਾਈ ਜੀ ਚਲੇ ਗਏ ਸਿਰਨਗਰ ਸੱਚੇ ਬਾਸ਼ਾ ਪਾਠ ਕਰ ਰਹੇ ਸਨ ਸਵੇਰੇ ਸ਼ਾਇਦ ਚੰਡੀ ਦੇ ਪਾਠ ਕਰ ਰਹੇ ਸਨ ਕੋਈ 8:30 ਦਾ ਟਾਈਮ ਹੋਣਾ ਹੈ ਤੇ ਮੈਨੂੰ ਪ੍ਰਸ਼ਪਾਲ ਸਿੰਘ ਵਾਲਾ ਫੋਨ ਆਇਆ ਕਿ ਸੱਚੇ ਬਾਸ਼ਾ ਜੀ ਪਾਠ ਕਰਦੇ ਉੱਠ ਗਏ ਨੇ ਕਹਿੰਦੇ ਕਿ ਬਾਜਪੇ ਦੀ ਜਾਨ ਨੂੰ ਖਤਰਾ ਹੈ ਤੁਸੀਂ ਰੀਸ ਜੀ ਕਹੋ ਹੁਣੇ ਬਾਜਪੇ ਨੂੰ ਫੋਨ ਕਰੋ ਜਿੱਥੇ ਉਹ ਜਾ ਰਿਹਾ ਉੱਥੇ ਨਾ ਜਾਏ ਮੈਂ ਕਿਹਾ ਇਹ ਸੱਚੇ ਬਾਸ਼ਾ ਇਹ ਮੇਰੇ ਤੇ ਕਿਉਂ ਜ਼ਿੰਮੇਵਾਰੀ ਪਾ ਰਹੇ ਹੋ ਤੁਸੀਂ ਕਿਰਪਾ ਕਰੋ ਤੁਸੀਂ ਆਪ ਰੱਖਿਆ ਕਰੋ ਦੀ ਪ੍ਰਸ਼ਪਾਲ ਕਹਿੰਦਾ ਜੋ ਸੱਚੇ ਕਹਿ ਰਹੇ ਨੇ ਉਹ ਤੁਸੀਂ ਹੁਕਮ ਪਾਲਣ ਕਰੋ ਤੇ ਸਭ ਕੁਝ ਠੀਕ ਆਪਕੋ ਕਿਰਪਾ ਦੋਣਾ ਆਪ ਹੀ ਕਰਨੀ ਮੈਂ ਉਸਦੇ ਫੋਨ ਕੀਤਾ ਉਸ ਰਾਜਪਵਨ ਗਵਰਨਰ ਜੀ ਦੇ ਜਿੱਥੇ ਬਾਜਪਈ ਠਹਿਰੇ ਸਨ ਉਹਨਾਂ ਨੇ ਕੀ ਵਜ੍ਹਾ ਹੋਈ ਕੀ ਨਹੀਂ ਪਰ ਬਾਜਪਈ ਗਏ ਗਏ ਨਹੀਂ ਅਗਰ ਉਹਨਾਂ ਪਤਾ ਲਗਾ ਜਿੱਥੇ ਉਹਨਾਂ ਜਾਣਾ ਸੀ ਉੱਥੇ ਬੰਬ ਪੰਪਫਲਟ ਕੀਤਾ ਸੀ ਰਿਮੋਟ ਕੰਟਰੋਲ ਚਲਾਉਣ ਦਾ ਪ੍ਰੋਗਰਾਮ ਸੀ ਐਂ ਸਤਗੁਰਾਂ ਨੂੰ ਬਖਸ਼ਿਸ਼ ਕੀਤੀ ਤੇ ਬਾਜਪਈ ਮੈਂ ਫਿਰ ਫਿਰ ਪਿੱਛੇ ਫੋਨ ਆਇਆ ਕਹਿਣ ਲੱਗਾ ਵੀ ਅੱਛਾ ਮੇਰੇ ਆਪਨਾ ਆਪਣੇ ਬੜੇ ਕੀ ਹੈ ਕੋਈ ਮੈਨੂੰ 2-3 ਦਿਨ ਸਤਗੁਰ ਜੀ ਕੇ ਕੌਤਕ ਲੈ ਕੇ ਕਰੋ ਮੈਂ ਕਹਿੰਦਾ ਜੀ ਮੈਂ ਜਦ ਤੱਕ ਸਤਿਗੁਰੂ ਕੋ ਇਜਾਜ਼ਤ ਨਹੀਂ ਲਾਂਗਾ ਮੈਂ ਨਹੀਂ ਰੱਖਾਂਗਾ ਮੈਂ ਫਿਰ ਸੱਚੇ ਪਾਤਸ਼ਾਹ ਨੂੰ ਅਰਜ਼ ਕੀਤੀ ਮੈਂ ਸੱਚਾ ਬਾਜਪਈ ਕਹਿ ਰਿਹਾ ਹੈ ਕਹਿਣ ਲੱਗੇ ਤੁਸੀਂ ਇੱਕ ਚਿੱਠੀ ਪਾੜੀ ਜੇ ਤੇ ਤਿੰਨ ਕੌਤਕ ਚਾਰ ਕੌਤਕ ਲਿਖਦੇ ਹੋ ਉਸ ਤੋਂ ਬਾਅਦ ਤੁਸੀਂ ਨਹੀਂ ਰੱਖਣਾ ਅੱਗੋ ਦੀ ਮਰਜ਼ੀ ਹੈ ਸਰਦਾ ਆਨੰਦ ਆਏ ਨਹੀਂ ਆਣਾ ਤਾਂ ਨਾ ਆਏ ਮੈਂ ਸੱਚਾ ਪਾਤਸ਼ਾਹ ਜੀ ਮੈਂ ਤੁਹਾਨੂੰ ਇੱਕ ਕੌਤਕ ਜੋ ਹੁਣੇ ਮੇਰੇ ਨਾਲ ਬੀਤੇ ਜੇ 6 ਮਹੀਨੇ ਦੀ ਪੁਰਾਣੀ ਗੱਲ ਹੈ 6 ਮਹੀਨੇ ਦੀ ਗੱਲ ਜੇ ਮੈਂ ਜਿਸ ਜਗ੍ਹਾ ਤੋਂ ਕਾਰ ਆਪਣੀ ਰਿਪੇਅਰ ਕਰਾਂਦਾ ਸੀ ਇੱਕ ਦਿਨ ਮੈਂ ਉਸ ਕੋ ਗਿਆ ਖੁੱਲਾ ਸੈਕਸ਼ਨ ਬਲਕਾਰ ਸਿੰਘ ਉਰੋ ਰਿਆ ਸੀ ਮੈਂ ਕਿਹਾ ਕੀ ਹੋਇਆ ਕਹਿੰਦਾ ਕਿ ਜੀ ਇਸ ਦਾ ਪਿਤਾ ਜੀ ਨੂੰ ਬਲੱਡ ਕੈਂਸਰ ਹੋ ਗਿਆ ਤੇ ਬੜੀ ਹਾਲਤ ਖਰਾਬ ਹੈ ਹਫਤੇ ਦੋ ਵਾਰੀ ਖੂਨ ਬਦਲਣਾ ਪੈਂਦਾ ਹੈ ਦੇਖਣ ਜਾਂਦਾ 70 75 ਸਾਲ ਦੀ ਉਮਰ ਹੋ ਗਈ ਮੈਂ ਕਿਹਾ ਇਸ ਤਰ੍ਹਾਂ ਹੈ ਕਿ ਮੇਰੀ ਕਿਤਾਬ ਵਿਚ ਆਇਆ ਇੱਕ ਜਵਾਨ ਮੁੰਡੇ ਨੂੰ ਬੋਨ ਮੈਰੋ ਖੂਨ ਬਣਾਨੀ ਨਹੀਂ ਸੀ ਤੇ ਸਤਿਗੁਰਾਂ ਦੀ ਕਿਰਪਾ ਕੀਤੀ 18 ਸਾਲ ਦੀ ਉਮਰ 'ਚ ਬੱਚੇ ਦਾ ਖੂਨ ਬੰਨਣਾ ਚાલુ ਹੋ ਗਿਆ ਤੇ ਤੁਸੀਂ ਖੁੱਲੇ ਸਿੱਖ ਹੋ ਤੁਸੀਂ ਮੰਦੇ ਦੀ ਦੇਹਦਾਰੀ ਗੁਰੂ ਨੂੰ ਤੁਸੀਂ ਇਹਨਾਂ ਗੁਰੂ ਲਾਣ ਦੇਵ ਜੀ ਬਣ ਕੇ ਚੱਲੋ ਤੇ ਤੁਹਾਡੀ ਕਿਰਪਾ ਹੋ ਜਾਏਗੀ ਕਦੇ ਮੈਂ ਪਤਾ ਇਹਨਾਂ ਗੱਲ ਕਰਾਂਗਾ ਸੋਚਾਂ ਤਿੰਨ ਚਾਰ ਦਿਨ ਬਾਅਦ ਆਇਆ ਕਦੇ ਪਿਤਾ ਜੀ ਕਹਿੰਦੇ ਨੇ ਕਿ ਬਈ ਤੂੰ ਜਾਓ ਐ ਗੁਨਾਰਨ ਦੇਵ ਜੀ ਨੇ ਮੈਨੂੰ ਲੈ ਕੇ ਚੱਲੇ ਗਿਆ ਸੱਚ ਵਾਹੇ ਕੋਲ ਤੇ ਨਿਤ ਰਾਮદાવાદ ਅਸੀਂ ਗਿਆ ਸੱਚ ਵਾਹੇ ਦੇ ਦਰਸ਼ਨ ਕਿੱਥੇ ਮੈਂ ਸੱਚ ਵਾਹੇ ਜੀ ਇਹਨਾਂ ਦੇ ਪਿਤਾ ਜੀ ਕਹਿੰਦੇ ਕੀ ਨਾਮ ਹੈ ਮੈਂ ਕਿਹਾ ਉਹਨਾਂ ਦੱਸਿਆ ਸੰਨਰੰਜਨ ਸਿੰਘ ਕਦੇ ਅਰਦਾਸ ਕਰਾ ਦਿਆਂਗੇ ਅਸੀਂ ਆ ਗਏ ਮੈਂ ਕਿਹਾ ਤੁਹਾਨੂੰ ਸਤਗੁਰਾਂ ਦਾ ਭਰੋਸਾ ਕਰਨ ਕਿਰਪਾ ਹੋ ਜਾਏਗੀ ਮੈਂ ਮਹੀਨੇ ਬਾਅਦ ਫਿਰ ਉਹਨਾਂ ਦੀ ਦੁਕਾਨ ਤੇ ਵੈਸੇ ਗਿਆ ਵਰਕਸ਼ਾਪ ਤੇ ਮੈਂ ਕਿਹਾ ਵੀ ਕੀ ਹਾਲ ਹੈ ਕਹਿੰਦਾ ਜੀ ਬੜੀ ਕਿਰਪਾ ਹੋ ਗਈ ਹੈ पर हाल ही महीने एक बार खून फिर चढ़ा पता है बिकर बहुत गाठा है लेकिन खून चढ़ता है मैं उठो ही मोबाइल तो फोन करता राजपालू मैं कैसे चुप पाछन कृपा कर एक बारी क्यों चढ़ा पांदा फिर मैं महीने बाद गया कहने लगे अपना खून बन रहे है बोन मेरो कम कर रही है ऑलरेडी मेडिकल डॉक्टर नु समझ नहीं आ रही कि बोन मेरो किदा काम कर लग गई चलो ये कृपा हो गई जी उस तो बाद एक मेरा बहुत पुराना दोस्त है का उन 6 साल हो गए नौकरी से रिटायर होया मैं उन लब्दा पे असा फोन नंबर चलांग मिल गया मैं उन फोन कीता मैं क्या जी ਉਮੇਸ਼ ਜੀ ਬਰਬਾਦ ਤੁਸੀਂ ਕਿੱਥੇ ਹੋ? ਉਹ ਕੰਨ ਜੀ ਪਹਿਲਾਂ ਤਾਂ ਮੇਰਾ 2 ਸਾਲ ਐਕਸੀਡੈਂਟ ਹੋਇਆ ਰਿਆ। ਪਿਆਰਿਆ ਹੁਣ ਮੈਂ 2 ਸਾਲ ਤੋਂ ਅੰਨਾਂ ਹੋ ਗਿਆ। ਮੈਂ ਕੀ ਹੋਇਆ ਕਹਿੰਦਾ ਡਾਇਬਟੀਜ਼ ਬੜੀ ਸਟ੍ਰੌਂਗ ਹੋ ਗਈ। ਮੈਂ ਕਿਹਾ ਮੈਂ ਹੁਣੇ ਹੌਲੇ-ਹੌਲੇ ਤੇ ਗਿਆ ਸੀ ਇੱਕ ਵਾਰੀ ਬੀਬੀ ਸੱਚੋ ਬੀਬੀ ਸੀ। ਉਹ ਕਹਿ ਰਹੀ ਸੀ ਮੇਰੇ ਘਰ ਵਾਲੇ ਨੂੰ ਕਾਲਾ ਮੋਤੀਆ ਹੋ ਗਿਆ ਤੇ ਰੋ ਰੋ ਕੇ ਸੁਣਾ ਰਹੀ ਸੀ ਕਹਾਣੀ। ਤੇ ਸੱਚੇ ਬਾਸ਼ਾ ਉਹ ਗਿਆ ਕਿ ਸੱਚੇ ਬਾਸ਼ਾ ਕਹਿੰਦਾ ਕੀ ਕਹਿੰਦਾ ਡਾਕਟਰ ਨੂੰ ਕਿਹਾ ਜੀ ਡਾਕਟਰ ਤਾਂ ਕਹਿੰਦਾ ਹੁਣ ਅੱਖ ਨਹੀਂ। ਕਹਿੰਦਾ ਕੋਈ ਗੱਲ ਨਹੀਂ ਸ ਨਵੀਂ ਅੱਖਾਂ ਦੇ ਦੇਾਂਗੇ। 6 ਮਹੀਨੇ ਉਹਦੀ ਨਵੀਂ ਅੱਖ ਆ ਗਈਆਂ ਤੇ ਸਤਿਗੁਰੂ ਕਿਰਪਾ ਕਰ ਸਕਦੇ ਨੇ ਤੂੰ ਮੇਰੇ ਨਾਲ ਚਲੋ ਬੀਬੀ ਸੱਚ ਬੋਲੀ ਸੀ ਝੂਠ ਨਹੀਂ ਬੋਲ ਸਕਦੀ ਕਹਦਾ ਜੀ ਮੈਨੂੰ ਲੈ ਚਲੋ ਮੈਂ ਉਹਨੂੰ ਲੈ ਕੇ ਗਿਆ ਮੈਂ ਸੱਚੇ ਬਾਸ਼ਾ ਕੋਲ ਗਿਆ ਮੈਂ ਸੱਚੇ ਬਾਸ਼ਾ ਜੀ ਆਪ ਜੀ ਨੇ ਬੀਬੀ ਸੱਚੋ ਤੇ ਕਿਰਪਾ ਕੀਤੀ ਉਹਦੇ ਘਰ ਵਾਲੇ ਦੀ ਅੱਖਾਂ ਨਵੀਆਂ ਦੇਤੀਆਂ ਇਹਨਾਂ ਨੂੰ ਕਿਰਪਾ ਕਰ ਦਿਓ ਕਹਿੰਦਾ ਕਿ ਮੈਂ ਕੌਣ ਆ ਨਾ ਦੇਣ ਵਾਲਾ ਸਤਿਗੁਰੂ ਦੇਣ ਵਾਲਾ ਹੈ ਤੂੰ ਮੇਰੇ ਤੇ ਪਾਈ ਜਾ ਰਹੇ ਹੋ ਮੈਂ ਸੱਚੇ ਬਾਸ਼ਾ ਜੀ ਤੁਸੀਂ ਸਤਿਗੁਰੂ ਹੋ ਤੁਸੀਂ ਸੱਚੇ ਬਾਸ਼ਾ ਹੋ ਕਿਰਪਾ ਕਰੋ ਕਹਿੰਦਾ ਕਿ ਅੱਛਾ ਅਣ ਭਜਨ ਉਹਨੇ ਭਜਨ ਲੈ ਲਿਆ ਉਹ ਬੰਦੇ ਨੇ 3:30 ਵਜੇ ਉੱਠ ਕੇ ਚਨਾਨ ਕਰਕੇ 4 ਵਜੇ ਉਸਨੇ ਭਜਨ ਕਰਨ ਬੈਠ ਜਾਣਾ ਉਹਦੇ ਮਨ ਦੀ ਸ਼ਰਧਾ ਬੜੀ ਹੋ ਗਈ ਉਹ 2 ਮਹੀਨੇ ਦਾ ਭਜਨ ਕਰਦਾ ਰਿਹਾ ਉਹਦੀ ਅਪਪੋਇੰਟਮੈਂਟ ਲੱਗ ਗਈ ਸੀ ਜੂਨ ਆ ਗਿਆ ਸੋ 15 16 ਜੂਨ ਉਹਦੀ ਅਗਸਤ ਡਾਕਟਰਾਂ ਤਰੀਕ ਸੀਗੀ ਅੱਖਾਂ ਦੇ ਡਾਕਟਰ ਆ ਉਹ ਡਾਕਟਰ ਨੂੰ ਫੋਨ ਕਰਦਾ ਡਾਕਟਰ ਸਾਹਿਬ ਮੇਰਾ ਦਿਲ ਕਰਦਾ ਤੂੰ ਮੇਰੀ ਅੱਖਾਂ ਇੱਕ ਵਾਰ ਟੈਸਟ ਕਰ ਲਓ ਕਹਿੰਦਾ ਅੱਛਾ ਪਰਸੋਂ ਮੈਂ ਨਾ ਰਾਸ਼ਪਤੀ ਦਾ ਆਪਰੇਸ਼ਨ ਕਰਦਾ ਕੋਈ ਉਹ ਪੇਸ਼ੈਂਟ ਨੇ ਆਣਾ ਤੂੰ ਆ ਜਾ ਉਹ 17 ਜੂਨ ਨੂੰ ਉੱਥੇ ਧਰ ਗਿਆ ਉੱਥੇ ਪਹੁੰਚਿਆ ਤੇ ਉਨੇ ਨੇ ਕਿਹਾ ਵੀ ਅੱਖਾਂ ਦਵਾਈ ਪਾਓ ਡੇਢ ਦੋ ਘੰਟੇ ਦਵਾਈ ਦੀ ਪਾਈ ਰੱਖੀ ਫਿਰ ਉਹਨੇ ਉਹਦਾ ਟੈਸਟ ਕੀਤਾ ਉਹ ਕਹਿੰਦਾ ਤੇਰਾ ਰੱਬ ਕੌਣ ਹੈ ਕਦੇ ਕੀ ਗੱਲ ਕਹਿੰਦਾ ਮੈਨੂੰ ਸਮਝ ਨਹੀਂ ਆ ਰਹੀ ਤੇਰੇ ਤੈਨੂੰ ਡਾਇਟ ਪੀਸ ਤੇਰੇ ਅੱਖਾਂ ਤੇ ਰੈਟੀਨਾਲ ਸਪੌਟਸ ਆਏ ਸਨ ਇਹ ਤਾਂ ਕਦੀ ਠੀਕ ਨਹੀਂ ਤੇਰੇ ਤੇ ਖੱਬੀ ਹੱਥ ਦੇ ਕੰਮ ਕੰਮ ਕਰਨ ਲੱਗ ਪਈਏ ਉਹਨੇ ਐਨਕ ਐਨਕ ਦਾ ਨੰਬਰ ਲਗਾ ਕੇ ਦਿੱਤੇ ਉਹ ਕਹਿੰਦਾ ਜੀ 2 ਸਾਲ ਦੇ ਬਾਅਦ ਮੈਂ ਆਪਣੇ ਘਰ ਨੂੰ ਪਹਿਲੀ ਵਾਰੀ ਵੇਖਿਆ ਰੋ ਰੋ ਕੇ ਉਹਨੇ ਆਪਣੀ ਕਹਾਣੀ ਸੁਣਾਈ ਐਸਨ ਸਤਕਰੋ ਨੇ ਇੱਕothe ਤੁਸੀਂ ਜਾਣਦੇ ਹੋ ਕਿ ਰੈਨਬੈਕਸੀ ਦਵਾਈਆਂ ਦੇ ਮਾਲਕ ਨੇ ਭਾਈ ਮੋਹਨ ਸਿੰਘ ਤੇ ਖੋਲੇ ਸਿੱਖ ਨੇ ਤੇ ਗੁਰਬ੍ਰਨ ਸਾਹਿਬ ਨੂੰ ਵੀ ਗੁਰੂ ਮੰਨ ਕੇ ਚੱਲਦੇ ਨੇ ਮੇਰਾ ਉਹਨਾਂ ਬੜਾ ਪਿਆਰ ਸੀ ਮੈਂ ਜਦੂ ਜਣਾ ਉਹਨਾਂ ਪੰਜ ਚਾਰ ਸਾਖੀਆਂ ਸੁਣਾਣੀਆਂ ਪਸੰਦਰ ਹੈ ਉਹਨਾਂ ਕਦੇ ਕੁਝ ਕਮੈਂਟ ਨਹੀਂ ਕੀਤਾ ਇੱਕ ਦਿਨ ਮੈਨੂੰ ਬੁਲਾਇਆ ਉਹਨਾਂ ਕਿੰਨਾ ਲੱਗਾ ਵੀ ਤੁਹਾਡੀ ਸਤਕਰੋ ਦਾ ਬੜਾ ਪਿਆਰ ਹੈ ਤੁਹਾਡਾ ਇੱਕ ਸੰਤ ਸਰਦਾਰ ਬਚਿੱਤਰ ਸਿੰਘ ਨੇ ਸੇਡ ਬਚਿੱਤਰ ਸਿੰਘ ਨੂੰ ਨਾਲ ਮੇਰਾ ਕੋਈ ਪ੍ਰਾਪਰਟੀ ਡਿਸਪੂਟ ਹੈ ਚੰਡੀਗੜ੍ਹ ਦਾ ਤੁਸੀਂ ਮੇਰੀ ਮਦਦ ਕਰੋ ਮੈਂ ਗਿਆ ਹਾਲੇ ਗਲਵਤ ਕਰ ਰਿਹਾ ਸੀ ਉਹ ਤੋਂ ਉਹਦਾ ਬੇਟਾ ਦੌੜਦਾ ਆਇਆ ਕਹਿੰਦਾ ਪਾਪਾ ਪਾਪਾ ਮੰਮੀ ਚੜਾਈ ਕਰ ਗਏ ਉਹਨਾਂ ਨੇ ਧਾੜਾ ਮਾਰ ਕੇ ਰੋਣਾ ਚાલુ ਕਰਤਾ ਤੇ ਉਹਨਾਂ ਦੀ ਅਸੀਂ 80 ਸਾਲ ਉਮਰ ਹੈ ਉਹਨਾਂ ਦੇ ਘਰ ਵਾਲੀ ਦੀ 75 ਸਾਲ ਹੈ ਕਨ ਗਰੀਸ਼ੀ ਸਤਿਗੁਰੂ ਕੋ ਮਹਿਤਵਾ ਹੋ ਜਾਊਗਾ ਮੇਰੀ ਕਿਰਪਾ ਕਰਨ ਮੇਰੀ ਘਰ ਵਾਲੀ ਰੋਕਣ ਬਚਾ ਮੈਂ ਕਮਨ ਫੋਨ ਦਿਓ ਮੈਂ ਫੋਨ ਲਗਾਇਆ ਤੇ ਉਹਨੇ ਕਿਰਪਾ ਕਰਨ ਸਤਗੁਰੂ ਨਾਲ ਫੋਨ ਬਸਵਾਲ ਨੇ ਫੋਨ ਚੱਕ ਲਿਆ ਮੈਂ ਕਿਹਾ ਜੀ ਮੈਂ ਭਾਈ ਮੋਹਨ ਸਿੰਘ ਦੇ ਕੋਠੇ ਤੇ ਬੋਲ ਰਿਹਾ ਤੇ ਉਹਨਾਂ ਦੇ ਘਰਵਾਲੀ ਇਸ ਤਰ੍ਹਾਂ ਲੱਗਦਾ ਕਿ ਚੜਾਈ ਕਰ ਗਈ ਹੈ ਸੱਚ ਪਾਹਿਲ ਮੈਂ ਸੱਚ ਪਾਹਿਲ ਨੂੰ ਦੱਸਿਆ ਕਹਿੰਨੇ ਕਿ ਉਹਨੂੰ ਕਹੋ ਘਰਵਾਲੀ ਨਹੀਂ ਮਰਦੀ ਫਿਕਰ ਨਾ ਕਰੇ ਮੈਂ ਕਹਿਆ ਸਤਗੁਰੂ ਮੇਰੀ ਗੱਲ ਕਰਾਓ ਉਹ ਟੈਲੀਫੋਨ ਤੇ ਬੋਲ ਮੈਂ ਬਹੁਤ ਬਹੁਤ ਰੋਣਾ ਚાલુ ਕਰਤਾ ਕਹਿੰਨਾ ਤੂੰ ਇਹ ਨੂੰ ਦਿਓ ਆਪਣੀ ਦੱਸੋ ਘਰਵਾਲੀ ਦਾ ਕੀ ਨਾਂ ਕੀ ਹੈ ਉਹਨੇ ਨਾਂ ਲਿਖਾਇਆ ਕਿ ਅਵਤਾਰ ਕੁਰ ਨਾਂ ਹੈ ਮੈਂ ਉਹਨੂੰ ਕਿਹਾ ਦੇਖ ਸਤਗੁਰੂ ਇਹ ਗੁਣਾਣਕ ਦੇਵ ਜੀ ਨੇ ਤੇ ਤੁਸੀਂ ਇਹਨਾਂ ਤੇ ਵਿਸ਼ਵਾਸ ਕਰਕੇ ਚੱਲੋ ਤੇ ਸਭ ਠੀਕ ਹੋ ਜਾਏਗਾ ਘਰ ਜੀ ਥੋੜੀ देर ਨੂੰ ਨਰਸ ਆ ਗਈ ਉਪਰੋਂ ਕਹਿੰਨ ਲੱਗੀ ਉਹ ਨਬਜ਼ ਨਬਜ਼ ਚੱਲੂ ਹੋ ਗਈ ਹੈ ਤੇ ਡਾਕਟਰ ਨੇ ਕਿਹਾ ਇੰਜੈਕਸ਼ਨ ਲਗਾਓ ਮੈਂ ਤੁਰ ਗਿਆ ਤੇ ਸੂਰੇ ਮੈਂ 9 ਵਜੇ ਫੋਨ ਕੀਤਾ ਕਹਿੰਨ ਲੱਗਾ ਰਾਤੀ ਹਾਲਤ ਬੜੀ ਖਰਾਬ ਸੀ 11 ਵਜੇ ਉਹਨੂੰ ਹਸਪਤਾਲ ਲੈ ਗਏ ਸ਼ਾਮੀ 5 ਵਜੇ ਫਿਰ ਬਾਈ ਮੋਹਨ ਸਿੰਘ ਜੀ ਫੋਨ ਆਇਆ ਕਹਿੰਨ ਰੀ ਜੀ ਮੈਂ ਸੱਚੇ ਪਾਤਸ਼ਾਹ ਦਾ ਕਿੰਦਾ ਧੰਨਵਾਦ ਕਰਾਂ ਰਾਤੀ ਹਸਪਤਾਲ ਲੈ ਗਏ ਤੇ ਉਹ ਕਹਿੰਦੇ ਬਰਾਉ ਡੈਡ ਮੈਂ ਕਿ ਮਰ ਨਹੀਂ ਸਕਦੀ ਸਤਿਗੁਰੂਆਂ ਨੇ ਬਚਨ ਕੀਤਾ ਉਹਨਾਂ ਨੇ ਚਾਰ ਪੰਜ ਡਾਕਟਰਾਂ ਨੇ ਚੈੱਕ ਕੀਤਾ ਕਹਿੰਦੇ ਹਾਂ ਥੋੜੀ ਨਬਜ਼ ਮਿਲ ਗਈ ਤੇ ਕੇਸ਼ੇ ਕੇ ਲਗਾਏ ਕਹਿੰਦੇ ਸਵੇਰੇ 8 ਵਜੇ ਦਾ ਨਾਸ਼ਤਾ ਕੀਤਾ ਤੇ ਮੈਂ ਆ ਗਿਆ ਹੁਣ ਉਹ ਹੁਣੇ ਵਾਪਸ ਆਲੇ ਇਸ ਗੱਲ ਨੂੰ ਅੱਜ 3 ਮਿੰਟ ਹੋ ਗਏ ਹੁਣ ਉਹਦਾ ਫੋਨ ਆਇਆ ਮੈਂ ਉਹਨੂੰ ਕਿਹਾ ਤੂੰ ਤੁਸੀਂ ਇਹਨਾਂ ਬਾਬਾ ਜੀ ਬਾਬਾ ਜੀ ਕਹ ਰਹੇ ਬਾਬਾ ਜੀ ਨਹੀਂ ਇਹ ਸਤਿਗੁਰੂ ਨੇ ਸੱਚੇ ਪਾਤਸ਼ਾਹ ਨੇ ਤੂੰ ਇਹ ਲੈ ਕੇ ਚਲੋ ਫੋਟੋ ਰੱਖੋ ਔਰ ਆਪਣੀ ਪੂਰੀ ਮਨ ਨਾਲ ਉਹ ਉਹਨਾਂ ਨੇ ਮੰਨ ਚਾਹਿਆ ਕਿ ਅਗਰ ਸੱਚਾ ਬੱਚਾ ਸਤਿਗੁਰੂ ਗੁਨਾਉ ਨਦੇਵ ਜੀ ਵਾਰਸ ਨੇ ਗੱਦੀ ਦੇ ਤੇ ਮੇਰਾ ਇੱਕ ਕੇਸ ਚੱਲਦਾ ਪਿਆ ਮੇਰੇ ਬਹੁਤ ਵੱਡਾ ٹرسٹ ਦਾ ਉਹਦੇ 50 ਲੱਖ ਕਰੋੜ ਰੁਪਈਆ ਫਸਿਆ ਉਹ ਮੇਰੇ ਹਾਰ ਚੁਕੇ ਸਨ ਤੇ ਤੂੰ ਮੇਰਾ ਕੇਸ ਜਿਤਾ ਦੇ ਤੇ ਮੈਂ ਮੰਨ ਜਾਗਾ ਤੂੰ ਸੱਚਾ ਬਾਸ਼ਾ ਹੁਣ ਪਰਸੋਂ 14 ਫੋਨ ਆਇਆ ਕਹਿੰਦਾ ਰੀਸ਼ ਜੀ ਚਮਤਕਾਰ ਹੋ ਗਿਆ ਮੈਂ ਹਾਰਿਆ ਕੇਸ ਡਬਲ ਬੈਂਚੇ ਜਿੱਤ ਗਿਆ ਤੇ ਹੁਣ ਮੈਂ ਇਹ ਚਾਹਾਂ ਕਿ ਜਿੰਨਾ ਪੈ ਹੈ ਮੈਂ ਉਥੇ ਅਪਰ ਹਸਪੀਟਲ ਦੀ ਸੇਵਾ ਤੇ ਲਗਾ ਦਿਆਂ ਤੇ ਤੁਸੀਂ ਅਰਜ਼ ਕਰੋ ਮੈਂ ਸੱਚਾ ਬਾਸ਼ਾ ਨੂੰ ਫੋਨ ਕੀਤਾ ਮਨ ਉਹਨਾਂ ਚਾਰਚ ਬਣਾਇਆ ਤੇ ਤੁਸੀਂ ਕੌਣ ਅਰਜ਼ ਕਰਵਾ ਲੈ ਹੁੰਦੇ ਹੋ ਜਿਹਨੇ ਲਗਾਣਾ ਆਪ आप ਕਰੇ ਆਪ ਇੱਥੇ ਆਏ ਇੱਥੇ ਪੈਸੇ ਦੀ ਕੋਈ ਪਰਵਾਹ ਨਹੀਂ ਮੈਂ ਉਹਨਾਂ ਨੂੰ ਕਹਿ ਕੇ ਆ संगत जी ਸੰਗਤ ਜੀ ਇਸਰਾ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਲਈਏ ਤੇ ਉਹਨਾਂ ਨੇ ਮੈਨੂੰ ਇੱਥੇ ਭਜਵਾਇਆ ਤੇ ਆਪ ਜੀ ਕਿਰਪਾ ਕਰਕੇ ਕੁਝ ਜੋ ਵੀ ਸੱਚੇ ਪਾਤਸ਼ਾਹ ਦੇ ਕੌਤਕ ਦੱਸ ਸਕਦੇ ਹੋ ਨਵੀਂ ਪੁਸਤਕ ਛਪ ਰਹੀ ਹੈ